ਕੋ ਮਨੁੱਖ ਮਨੁੱਖ ਤੇ ਕੀ ਹੋਏ ਆਵੇ ਜੋ ਕਿਸ ਭਾਵੇ ਸੋਈ ਕਰਾਵੇ ਕੋ ਮਨੁੱਖ ਤੇ ਕੀ ਹੋਇਆ ਵਾ ਜਿਵੇਂ ਆਦਮੀ ਹੈ ਉਹ ਤੇ ਕੁਝ ਨਹੀਂ ਹੋ ਸਕਦਾ ਇਹ ਕਿਸ਼ਕਰ ਜੇ ਬਸਾ ਕੋ ਜੋ ਪਾਵੈ ਸੁਣੇ ਤਰਾ ਅਸਧ ਦੇ ਵਿੱਚ ਸਰੀਰ ਦੇਟਾਰੇ ਜਿਹੜਾ ਉਸ ਜੀਵ ਆ ਜਿਹੜਾ ਜਨਮ ਲਿਆ ਇਹ ਜਮਾ ਰਜਾ ਤਮਸ ਹਦੋਂ ਤੱਕ ਨਾ ਮੋੜਨ ਤੱਕ ਕੋਈ ਜੀਵ ਜੀ ਪਰ ਜਿਹੜਾ ਸ਼ਰੂ ਕਹਿੰਦਾ ਨਾ ਕਿ ਉਹ ਕਾਲ ਕਾਲੇ ਤਰਾਵਣ ਜਦ ਤੱਕ ਕਰਦੇ ਹੈ है वो ਇਹ ਜੀਵ ਹੈ ਕਲ ਜੋਗ ਹੋਵੇ ਕਲ ਜੋਗ ਉਹਨਾਂ ਦਾ ਅਰਤੀ ਸੁਖਾ ਰੱਖਦਾ ਹੈ ਉਹ ਆਪਣੀ ਇੱਛਾ ਨਾਲ करवा ਜੋਗ है ਕਰਵਾ ਸਕਦਾ ਹੈ है ਕਲ ਜੋਗ ਹੈ ਕਲ ਹਾਰ ਦਿਆ ਤਨ ਹਰ ਆਪ ਕਰਦਾ ਕਲ ਹਰਦਾ ਆਪ ਕਰਦਾ ਉਹਦੇ ਕੋਈ ਸ਼ਰੀਰ ਹੈ ਕਾਲ ਜੋਗਰ ਕਾਣ ਹਾਰ ਦੇ। ਕਲ ਕੋ। ਕਾਣ ਦਾ ਆਗੁਰ ਕਾਣ ਜੋਗ। ਅਸੀਂ ਯੋਗ ਦੀ ਕਾਣ ਹਾਰਾਂ ਉਹ ਕਾਣ ਯੋਗ ਹੈ ਕਾਣ ਹਾਰ ਦੀ। ਉਹ ਕਰਾਉਂਦਾ ਅਸੀਂ ਕਰਦੇ ਹਾਂ। ਅਸੀਂ ਕਰ ਸਕਦੇ ਹਾਂ ਪਰ ਆ ਨਹੀਂ ਸਕਦੇ। ਅਸੀਂ ਉਹੀ ਕਰਦੇ ਹਾਂ ਜਿਹੜਾ ਉਹ ਕਰੋ। ਕਾਣ ਜਿ ਹਾਰ ਅਸੀਆਂ ਕਾਣ ਜੋਗ। योग है वो का जो है असली काल योग नहीं है काल योग दा कुछ कर सकदा है ऐदा सक, कर सकदे कर सकदे दी पर करदे हो कद है ऐथो नहीं पर समझोगा ऐथो नहीं आके पुट दिमाग से नहीं हो सकदे सी हो करवाउंदा वो योग हो है ਕਾਹ ਨਹੀਂ ਜਦ ਮੈਂ ਕਰਦਾ ਹਾਂ ਨਾਕਾਉਟ ਹੀ ਹੋਊਂਗਾ ਤਾਂ ਹੀ ਕਰਦੀ ਪਰ ਇਥੋਂ ਗਲਤੀ ਕਰਦੇ ਇਹ ਗੱਲ ਮੰਨਦੇ ਆ ਅਸੀਂ ਕਿ ਨਾ ਕਹਿਨੇ ਆਪ ਜਵਾ भी ਕਰਦੇ योग ਤਾਲੀ है, ਹੋਹੀ ਹੈ ਹਾਲਾਂਕਿ ਸੱਚਾ ਵੀ आम ਹੋ अंदरों ਹੈ ਕਰਨ ਜੇ ਦਾ ਕਾਰਨ ਹਾਰੇ ਪਰਮੇਸ਼ਰ ਨੂੰ ਕੇ ਹੁਣ ਤਫੇ ਤੇ ਤੋਗੇ ਨਹੀਂ ਆਈ ਹਾਂ ਕਹਿੰਦੇ ਹਾਂ ਕਹਾਂ ਕਾਰਨ ਹਾਰੇ ਜੀਰਾ ਨਹੀਂ ਜੇ ਇਹ ਕਰਵਾਏ ਤੋਂ ਬਿਨਾ ਕਾਰਨ ਹਾਰੇ ਪਹਿਲਾ ਦਿੱਤੀ ਬਟਨਾਰਨ ਕਾਰਨ ਹਾਰੇ ਜੀਰਾ ਦਿੱਤੀ ਸਰੀਰ ਤੇ ਬਣ ਸਿਰਈ ਚਾਹੀਦਾ ਲੋ ਜੋਦਸ ਤੋਂ ਅਗਰ ਗੋਬਰਸ ਹੋਈ ਜੀ ਕਰੂ ਜਿਹੜਾ ਕੱਲਾ ਜੀਵ ਉਹ ਸਰੀਰ বিনা ਕੁਝ ਕਰ ਸਕਦਾ ਜੀ ਤਾਂ ਦਾ ਵੀ ਹੈ ਮਾਨਸਾ ਪਰਮੇਸ਼ਰ ਦਾ ਵੀ ਹੈ ਤਾਂ ਸਰੀਰ ਚਾਹੀਦਾ ਕੁਝ ਮਾਇਆ ਦੇ ਦਖਲ ਦੇਣ ਵਾਸਤੇ ਸਰੀਰ ਹੀ ਕੋਲ ਸਰੀਰ ਹੀ ਆਉ ਦਿੱਤਾ ਹੈ ਉਹ ਇਹਨਾਂ ਤੇ ਕਰਵਾਉਂਦਾ ਜਿੱਥੇ ਖਾਮੋ ਕੱਲ ਨੂੰ ਆਪੇ ਜੀ ਜਿਸ ਜਿਹੜੇ ਵੀ ਤਰਨ ਵਾਲੇ ਜੀੜਾ ਨਹੀਂ ਉਹ ਸਹੀ ਹੈ ਨਹੀਂ ਜਿਹੜਾ ਦਾ ਸਹੀ ਹੁੰਦਾ ਜੀ ਜਾਣਦਾ ਉਹ ਕੱਲਿਆ ਰਖਿਆ ਜਿਹੜਾ ਉਹ ਕਲਿਆਤਮਾ ਅਸਲੀਅਤੇ ਖੁੱਤੀ ਪੜੀ ਜਾਂਦੇ ਹੂਤੋ ਉਹ ਤਾਂ ਜਾਂ ਕੋਈ ਜੀੜਾ ਫੜਦੇ ਹੋ ਸਰੀਰ ਕੋ ਥੋ ਅੱਲਾ ਦੇ ਬਾੜ ਹੈ ਤੁਸੀਂ ਕਿੱਥੇ ਗਲਤੀ ਕਰਦੇ ਆਂ ਜੀ? ਉਹ ਵਾਣਾ ਜੀ ਇਹ ਲੱਗਿਆ ਤੁਸੀਂ ਇਸਰੀ ਨਾਲ ਅਟੈਚ ਕਰਦੇ ਜੰਤਰੀ ਹੋਣਾ। ਹਾਂ ਜੀ ਜੱਗਤ ਸਭ ਤੇਰਾ। ਆ ਜੱਟ ਕਿਉਂ ਆ? ਕਦੇ ਜੀਹਾਂ ਸਰਦਾ ਜੀ। ਕਦੇ ਜੀਹਾਂ ਜ਼ੱਤ ਜੰਤ ਕਿਉਂ ਆਇਆ? ਲੋਕ ਅਲੱਗ-ਅਲੱਗ ਕਰਨੇ ਲੱਗੇ। ਜੀ ਕੇ ਜੰਤ ਘਰੀ ਨਾਲ। ਐਟੋਮੀ ਜੰਤ ਕੋਲੋਂ ਅਟੈਚ ਕਰਦੇ। ਸੁਰਖ ਸਾਵਧਾਨੀ ਨਾਲ ਦੇਖੋ ਕੀ ਦਿਖ ਰਿਹਾ ਬੜਾ ਖਤਰਨਾਕ ਹੈ ਤਾਂ ਦਾ ਥੋੜੋ ਜਿਹਾ ਸਾਵਧਾਨੀ ਦਾ ਗੱਲ ਕੀ ਜੇ ਉਹਨੇ ਸਹਿਕੇ ਬਲੋ ਜੇ ਸੱਤ ਨਾ ਗਈ ਟਿੱਕ ਗਈ ਤੇ ਛੱਟ ਗਿਆ ਵਿਚੋ ਜੀ ਰਕੇ ਹਮੂਰ ਚੜ ਜੀ ਰੇ ਕਿਤੇ ਉਲਾਹ ਵਡਾਣਿਆਸ ਜਿਹਦੇ ਨੂੰ ਕਹਿਆ ਸ੍ਰੀ ਤਾਂ ਆਡਾ ਜਦ ਉਪਦੇਸ਼ ਕੀਤਾ ਉਹਦੋਂ ਆਪਾਂ ਨੂੰ ਕੀਤਾ ਇਸ ਸਰੀਰ ਦਾ ਸਰੀਰ ਐ ਨਹੀਂ ਕਪੜਾ ਕਦੇ ਸੁਣਿਆ ਉਹਨਾਂ ਸਰੀਰ ਤਾਂ ওই ਕਮਨ ਨੂੰ ਕਦੇ ਸੁਣੇ ਤੁਹਾਾਰ ਦੇ ਨੂੰ ਤੀ ਕਹ ਬਗਲ ਤੀ ਲੋ ਹਾਂਜੀ ਉਹ ਮਾਨੁਖ ਤੇ ਕੀ ਹੋਵੇ ਆਵੇ ਕੀ ਹੋਏ ਆਵੇ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ ਜੇ ਸਭ ਰੁਕਤੇ ਹੋਏ ਇਹ ਹੋਏ ਆਵੇ ਕੀ ਕਰ ਸਕਦਾ ਹੈ ਇੱਕ ਕੀ ਬਣ ਸਕਦਾ ਹੈ ਹਾਂ ਬਣਦਾ ਹੈ ਜੇ ਜੋਤਿਸ ਭਾਵੇ ਸੋਈ ਕਰਾਵੇ ਕਾਤਾ ਜ਼ਰੂਰੀ ਹੈ ਕਾਲ ਹਾਰ ਹੈ ਪਰ ਕਾਲ ਜੋਗ ਨਹੀਂ ਹੈ ਉਹ ਕਾਰਨ ਜੋਗ ਇਸ ਕਰਕੇ ਕਰਾਵਣ ਡਾਇਦੇ ਕਲਨਹਾਰ ਇਹ ਤੇ ਕਲਨਹਾਰ ਕਾਰਨ ਜੋਗ ਤੇ ਨੂੰ ਫਿਰ ਵੀ ਕਰਦੇ ਜਿ세ਗਾ ਕਾਰਨ ਕਰਾਵਣ ਕਲਨ ਜੋਗ ਜੋਤਿਸ ਭਾਵੇਂ ਸੋਈ ਹੋਵੇ ਉਹ ਪਹਿਲਾਂ ਜੀ ਜੋਤਿਸ ਭਾਵੇਂ ਸੋਈ ਹੋਵੇ ਇਹਨਾਂ ਜੋਤਿਸ ਭਾਵੇਂ ਸੋਈ ਕਰਾਵਾ ਸੋਈ ਕਰਾਵਾ ਐਦਾਂ ਤੇ ਨਾ ਪੜਨਾ ਪਊ ਬਹੁਤ ਬੜੀ ਹੀ ਆ ਇਹ ਜਿਹੜੀ ਲਿਖਣ ਸ਼ੈਲੀ ਕਪੂਰ ਕਾ ਉਹ ਇਹ ਦੀ ਹੈ ਨਾ ਸੁਣੋ ਜੀ ਕੋਈ ਖਤਮ ਆ ਰਿਹਾ ਇਸ ਜੱਗ ਵਿੱਚ ਆਹ ਕੋ ਬੁਝਾਦੀ ਹੈ ਪੰਚੀ ਤਲਵਾਰ ਮੰਗੂ ਪਤਾ ਹੀ ਨਹੀਂ ਕਿੱਧਰੋਂ ਕਿੱਧਰ ਸੱਜੀਆਂ ਜੀ ਗੱਲ ਰਹੀ ਦੇਖਣ ਨੂੰ ਪਾਸ਼ਾ ਸਿੱਧੀ ਜੀ ਲੱਗਦੀ ਹੈ ਹਵਾ ਦੇ ਕੋ ਮੈਂ ਜੀ ਹੋਇਆ ਉਹ ਤੇ ਸਾਰੇ ਕਰਾਵੇ ਉਹ ਜਿੰਨਾ ਹੋਵੇ ਜੀ ਹਾਂ ਕੋ ਮੁੱਖ ਤੇ ਕੀ ਹੋਏ ਆਵੇ ਜੋ ਤੋ ਸੁਭਾਵੇ ਸੋ ਹੀ ਕਰਾਵੇ ਦੁਰਬੋਧਾ ਕਰਾਉਂਦਾ ਕਰਦਾ ਇਹੀ ਹੈ ਠੀਕ ਹੈ ਪਰ ਕਰਾਉਣ ਵਾਲੇ ਦੀ ਜੋ ਕੋਈ ਤਾਂ ਦੀ ਪੁੰਨ ਪਾਪ ਹੈ ਤੇ ਕਰਾਉਣ ਵਾਲੇ ਨੇ ਕਰਾਇਆ ਜਿਹਾ ਸਭ ਨੂੰ ਕੋ ਸਜਾ ਇਹਨਾਂ ਨੂੰ ਪਹਿਖਾ ਹੈ ਇਹ ਹੀ ਤਾਂ ਹੀ ਘਾਇਰਿਆ ਸਤਨਾ ਤਾਂ ਕਾਗਨ ਤੇਰੇ ਮੇਰਾ ਮਨੇ ਜੁੱਤੀ ਵਾਰੀ ਰਹੀ ਕਰਮ ਦੇ ਵਿੱਚ ਤੇਰਾ ਕੋਣ ਉਤਰਉਣ ਵਾਲਾ ਕੋਣ ਤੇਰਾ ਜੀ ਹੋਇਆ ਬਈ ਹਲੇ ਕਾਢੂ ਕਰਾਉਣ ਦਾ ਤਾਂ ਨੇ ਜੋਗ ਹੈ ਤਾਂ ਕੋਣ ਹੈ ਜੀ ਤੇਰਾ ਐਸੀ ਤਰ੍ਹਾਂ ਕੋਣ ਇਹ ਕੋਣ ਤੇਰਾ ਨਾ ਸੋਝੂ ਫਿਰ ਤੇਣੀ ਕੋਣ ਹੈ ਤੇਰੇ ਕਿ ਇਹ ਗੁਣਾ ਆਏਗਾ ਫਿਰ ਮੈਨੂੰ ਕੋਈ ਦਿੱਕਤ ਸਮਝ ਬਰੀ। ਜਾਂ ਆਪਣੇ ਗੁਣ ਤੋਂ ਭੁਕਰ ਆ ਮੈਨੂੰ ਬਰੀ ਕਰ। ਸਾਦਾ ਆਪਣੇ ਗੁਣ ਤੋਂ ਭੁਕਰ ਜਾ। ਮੈਨੂੰ ਬਰੀ ਕਰ। ਭੰਤਾਨੇ ਫਸਾ ਕੇ ਪਰਮੇਸ਼ਰ ਉਪਰੀ ਹੋਇਆ ਬਕਾਲਸ ਇਸਕਾ ਹੱਥ ਹੋਏ ਤਾਂ ਸਭ ਕੁਛ ਲੈ ਇਸਕੇ ਹੱਥ ਹੋਏ ਜੇ ਇਹਦੇ ਹੱਥ ਹੋਵੇ ਤੇ ਆ ساری ਦੁਨੀਆ ਦੀ दौਲਤ ਆਪਣੇ ਕੋਲ ਠੀਕ ਆ ਉਹ ਸਭ ਕੁਝ ਜੇ ਆਪਣੇ ਹੱਥੇ ਚ ਆ ਸਵੇ ਇਸਕੇ ਕਰੇ ਉਹ ਜੋ ਜੋ ਸਾਧਗੰ ਜੋ ਪੂਰਨ ਬ੍ਰਹਮ ਨੂੰ ਕੋ ਹੁੰਦਾ ਨੂੰ ਕੋ ਉਹ ਹੁੰਦਾ ਜੋ ਹੁਕਮ ਹਤਾ ਹੋਈ ਹੁੰਦਾ ਜੋ ਤੇਸ ਪਾਵੇ ਸੋਈ ਕਰੇ ਇਸਕੇ ਹੱਥ ਹੋਏ ਤਾਂ ਸਭ ਕੁਝ ਲੈ ਇਹਦੇ ਹੱਥ ਜੋ ਬੇ ਕੁਝ ਕਰਨਾ ਇਹਦਾ ساری ਦੁਨੀਆ ਤੇ ਦੁਨੀਆ ਦਾ ਰਾਜ ਉਹਨੇ ਦਿਖਾ ਦੇ ਦਾ ਆਪਣੇ ਅੱਗੇ ਕਰਦਾ ਜੋ ਤੇਸ ਪਾਵੇ ਸੋਈ ਕਰੇ ਇਹਦਾ ਉਹੀ ਕਰਦਾ ਜਿਹੜਾ ਉਹਨੂੰ ਪਾਉਂਦਾ ਜਿਹੜੀ ਗੱਲ ਕਰਦਾ ਉਹ ਸਹੀ ਹੋਵੇ ਇਹ ਤਾਂ ਉਹ ਨਹੀਂ ਅੱਗੇ ਸਾਵੇ ਦੀ ਫਲਾਤੀ ਫੇਰ ਜਾਂਦੀ ਹੈ ਅਨਜਾਨਤ ਵਿਖਿਆ ਮੈਂ ਜੇ ਜਾਨ ਤ ਆਪਣ ਆਪ ਵਜੇ ਇਹ ਜਾਣੇ ਨਹੀਂ ਜਾਣਵਾ ਨਹੀਂ ਹੈ ਅਗਿਆਨਤੀ ਹੋਣ ਕਰਕੇ ਇਸੇ ਮਾਰਾ ਜਰਤ ਮਾਇਆ ਕੋ ਰਖਣਾ ਨਹੀਂ ਸੀ ਜਜੇ ਤੇ ਹੋਇਆ ਜਿੱਦਣ ਇਹਨ ਮਾਰਾ ਦਾ ਜਾਨ ਹੋ ਗਿਆ ਮਾਰਾ ਸਭ ਜੂ ਛੱਡ ਕੇ ਭਜੂਗਾ ਹੈ ਅਣਜਾਣ ਤ ਬਿਖਿਆ ਮੈ ਰਜਾ ਜਲਸੇ ਮਾਇਆ ਚ ਸ੍ਰੀ ਸਾਹਿਬ ਅਗਿਆਨਤਾ ਵਸ ਬਖਿਆ ਚ ਰਜਦਾ ਜੇ ਜਾਣਦਾ ਆਪਣਾ ਬਚੇ ਫਿਰ ਤਾਂ ਦੂਰ ਦੇ ਲਗੂ ਆ ਜੇ ਫੇਰ ਆਪਣਾ ਆਪ ਬਚੇ ਜੇ ਜਾਣਦਾ ਆਪਣਾ ਬਚੇ ਅਣਜਾਣ ਤ ਬਿਖਿਆ ਮੈ ਰਜਾ ਜਾਣਦਾ ਦੂਈ ਗਿਆਨ ਤੰਬਿਛੇ ਦੇ ਵਿੱਚ ਰਜਦਾ ਜੇ ਜਾਣੇ ਸਤਾਵੇ ਆਪਣੇ ਆਪ ਨੂੰ ਬਚਾਵੇ ਕਿਥੇ ਆਇਆ ਨਾ ਗੜੀ ਚਾ ਅੰਦਰ ਆ ਲੋ ਸਤਾਵੇ ਕੋਈ ਨਾ ਗਰੀ ਨੂੰ ਕੋਲ ਨਿਪਟਾਉਂਦਾ ਨਹੀਂ ਪਰਵੇਂ ਪੂਲਾ ਦਾ ਇਹ ਸਤਾਵਾ ਹੈ ਨੀਮ ਕੁਮਾਹੇ ਚਾਰ ਪੁੰਟ ਫਿਰ ਆਵੇ ਪਰ ਬਿਲਕੁਲ ਪਰਵੇਂ ਕਿਉਂ ਲਾਉਂਦਾ ਉਹ ਸੁਪਨਾ ਇਹ ਸੁਪਨਾ ਸੱਚ ਨੂੰ ਜੀ ਵਿੱਚ ਉਹ ਡਾਕਟਰ ਸਾਹਿਬਾਂ ਸੁਪਨੇ ਜਿਨੇ ਸੱਚਾ ਹਰਦਾ ਹੋਵੇ ਦਿਖਾਉਂਦੀ ਉਹਦੀ ਸੱਚ ਕਰਨ ਦੇ ਸਾਰੇ ਸਪੂਰ ਉਹ ਦੇਖਾਂ ਕਦ ਵੀ ਗਿਆ ਸੀ ਦੇਖਾਂ ਗਈ ਸੌ ਉਸਨੇ ਵੀ ਉਹ ਦਿਖਾਉਂਦੀ ਉਹ ਤੇ ਗਗਨ ਤੇ ਕੋਈ ਦੇਖਾਂ ਦਿਉਂਦੀ ਉਹ ਤੇ ਕੜਾ ਸੂਰ ਚੱਲਣਾ ਇਹ ਤੇ ਹਾਲ ਕਰੇ ਤੇ ਅਨਾਉਂਸਰ ਸੂਰ ਚੱਲਣਾ ਨਾ ਚੱਲਣਾ ਨਾ ਕੋਈ ਤੇ ਕੋ ਬੁਦਾ ਉਪੂਰ ਬੁਦਾ ਧਰਤੀ ਕੋ ਹੈ ਨਾ ਤੇ ਗਾਜ ਬਖਰਾ ਇੱਥੇ ਗਾਜ ਖੜਾ ਬਖਰਾ ਤਾਂ ਇੱਥੇ ਦੇ ਜਾ ਉਹਦੇ ਸਭ ਕੁਝ ਖੜਾ ਹੈ ਇਸ ਕਰਕੇ ਜਿਹੜਾ ਪਰਮ ਪਰਮ ਕਾਕੇ ਇਸ ਸੰਸਾਰ ਨੂੰ ਸੱਚ ਪੜਿਆ ਹੋਇਆ ਆ ਜੀਵਰ ਜਾ ਕੇ ਸੱਚ ਕਾਲ ਜਾਣ ਆ ਸੱਚ ਨਹੀਂ ਹੈ ਇੱਥੇ ਸੱਚ ਜਾਣਨ ਦੇ ਵਾਸਤੇ ਜਿਹਦਾ ਪਰਮ ਦੂਰ ਹੋ ਗਿਆ ਸੱਚਾ ਜਿਹੜਾ ਦਾਸ ਗਿਆ ਜਿਹਨੇ ਮੰਨ ਲਿਆ ਕਿ ਸੁਪਨੇ ਨੂੰ ਸੁਪਨਾ ਦੀ ਸਮਝ ਆ ਗਈ ਸਮਝ ਗਿਆ ਇਹ ਬੱਕੇ ਸੁਪਨਾ ਹੀ ਹੈ ਔਰ ਜਾਗ ਗਿਆ ਫਿਰ ਤਾਂ ਸੁਪਨੇ ਫਿਰ ਤਾਂ ਸੱਚ ਨਹੀਂ ਫਿਰ ਤੂੰ ਹੰਗਾ ਪਹਾੜੇ ਤੂੰ ਹੰਗਾ ਪਹਾੜੀ ਦੇ ਅੰਦਰ ਬਾਹਰ ਤਾਂ ਵੀ ਨਾ ਉਸ ਦਾ ਬਸ ਤੂੰ ਹੰਗਾ ਹੁੰਦਾ ਆਈਆ ਵਾ ਪਰੇ ਕ੍ਰਿਪਾ ਜਿਸੋ ਆਪਣੀ ਭਗਤੀ ਦੇ ਨਾਨਕ ਤੇ ਜਨ ਨਾਮ ਮਿਲੇ ਆਪਣੀ ਕਿਰਪਾ ਕਰਕੇ ਜਿਹਨੂੰ ਆਪਣੀ ਕ੍ਰਿਪਾ ਦੇਤੀ ਜੀਤੇ ਤੇ ਕਿਰਪਾ ਕਰਕੇ ਆਪਣੀ ਕਿਰਪਾ ਦੇਤੀ ਨਾ ਤਾਂ ਕਹਨ ਉਹਨੂੰ ਲੋਰ ਦਿੰਦਾ ਨਾਨਕ ਤੇ ਜਨ ਨਾਮ ਮਿਲੇ ਉਹ ਜਾਨੂ ਨਾ ਮਰ ਜਾਂਦਾ ਨਾਮ ਸਿਲੇ ਨਾ ਬੰਦਾ ਉਹਨੂੰ ਜਿਹਨੂੰ ਭਗਤੀ ਦੇਤੀ ਭਗਤੀ ਦੇਣੀ ਹੈ ਪਹਿਲਾਂ ਸਤੋ ਸਤੋ ਦੀ ਗੱਲ ਨਹੀਂ ਕਿਹਾ। ਭਗਤੀ ਜਦਿਆਂ ਨੇ ਉੱਤਰੇ ਦੀ ਜਿਹੜੇ ਸਟੇਸ਼ਨ ਤੇ ਕੁਰਸੀ ਦਿੱਤੀ ਉਹ ਜੇ ਉੱਤਰੇ ਦੀ ਛੱਡੀ ਨਹੀਂ ਨਾਮ ਦਾ ਗੱਲ ਜਾਣਾ। ਉਹ ਬਦਲੇ ਨਹੀਂ ਜਾਂਦੇ ਅੱਗੇ ਸਦੋਂ ਉਹ ਤੇ ਵੀ ਬੈ ਜੋ ਹਮ ਕਹਾ ਫੇ ਗੱਲਾਂ ਨੇ। ਅਗਰ ਤਾਂ ਭਗਤੀ ਸਤੋ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਸਭ ਤੋਂ ਉੱਪਰ ਦਾ ਜਪਿਆ ਬੁਖਤੀ ਨਹੀਂ ਹੈ ਸਭ ਤੋਂ ਉੱਪਰ ਜਪਤੀ ਹੈ ਆ ਜਿਹੜੀ ਮਾਇਆ ਹੈ ਨਾ ਆਹ ਕਹਿੰਦੇ ਸੀ ਜੇ ਜਾਣਦਾ ਆਪਣਾ ਆਪ ਬਚੇ ਆਈ ਖੁਸ਼ ਹੈ ਕੋਈ ਨਾ ਕੁਰਬਾਨੀ ਤੋਂ ਅਣਜਾਣ ਦੇ ਬਿਠਿਆ ਮਹਿਰਾਜ ਜਿੱਦਾਂ ਆ ਗੁਰਬਾਨੀ ਨੂੰ ਸਮਝਦਾ ਕੀ ਹੈ ਆਪਣੇ ਆਪ ਬਚਣ ਦਾ ਨਾ ਸਿੱਖ ਨੂੰ ਕੀਤੇ ਹੋਗੀ ਆਪਣੇ ਆਪ ਨੂੰ ਮਾਇਆ ਤੋਂ ਬਚਾਉਣਾ ਹੀ ਮੁਕਤੀ ਹੈ ਹੋਰ ਕੁਝ ਨਹੀਂ ਹੈ ਆਪਣੇ ਆਪ ਨੂੰ ਮਾਇਆ ਤੋਂ ਬਚਾਉਣਾ ਵੀ ਮਾਇਆ ਨਗਰਾਂ ਮਾਰ ਦਵੇ। ਜੇ ਮੁਕਤੀ ਹੋਰ ਮੁਸੀਹੀ ਹੈ ਇਹ ਤਾਂ ਬਾਦ ਕਹਾ ਕਹਤੀ ਹੈ। ਮਾਇਆ ਤੋਂ ਬਚ ਕੇ ਰਹੇ ਤੇ ਭਗਤੀ ਕਰ ਦਰ। ਜੇ ਮਾਇਆ ਵਲੇ ਤੇ ਆ ਰਹਣਾ ਮੇਂ ਨਗਰਾਂ ਮਾਰ ਦਵੇ। ਉਹ ਭਗਤੀ ਹੈ। ਜੈਨਤ thiệt ਕੇ ਲੈ ਲੇ ਤੇ ਕਾਂ ਦੀ ਜਮੈਂ ਚਾਰੇ ਪਾਸੇ ਤਾਂ ਦੁਸ਼ਮਣ ਫੈਰੰਗ ਹੋ ਰਹੀ ਹੈ। ਜਿਹੜੇ ਉਸਤੇ ਸਪਾਈ ਖੜੇ ਨੇ ਕਿ ਕਦੇ ਦੀ ਪੌੜੀ ਲਾ ਕੇ ਨਾ ਕਿ ਚੜ ਜਾਏ ਕੋਈ ਹੋਰ ਉਡਾ ਦੇ ਤਾਂ ਉੱਥੇ ਜੀਣਾ ਨਹੀਂ ਐ ਇਹ ਮਹੌਲ ਦੇ ਵਿੱਚ ਜੇ ਮਹੌਲ ਆਏਗਾ ਉਹ ਮੇਜਾ ਕਿ ਜਿਹੜੇ ਤੇ ਜਾ ਕੇ ਉਡਾਣ ਵਾਲੇ ਡੁੱਗੂ ਡੰਡ ਅਸੀਂ ਆਪਣਾ ਖੁੱਡਾ ਉੜਾ ਕੇ ਆਪਣਾ ਡਿਫੈਂਸ ਕਰਦੇ ਹੁੰਦੇ ਹਾਂ ਉੱਥੇ ਭਗਤੀ ਹੋਣੀ ਕੋਈ ਨਹੀਂ ਭਗਤੀ ਹੋਣੀ ਹੋਣੀ ਅਨ ਵੀ ਜਾਂਦਾ ਹੋਇਆ ਬੇਗੁਜ਼ਰੀ ਹੋਊ ਕੋਈ ਚਿੰਤਾ ਦੀ ਹੋਊ ਅਮਨ ਹੋਊ ਇਹ ਵੈਰੀ ਬਗਾਨਾ ਜਿਹਦੇ ਵੈਰੀ ਬਗਾਨਾ ਬਖੀ ਨਹੀਂ ਹੋ ਸਕਦੀ ਕੀ ਆਪਣਾ ਪ੍ਰਾਇਦਾ ਭਗਤੀ ਨਹੀਂ ਹੋ ਸਕਦੀ ਮਾਇਆ ਦੀ ਖਤਰ ਬਖਤੀ ਨਹੀਂ ਹੋ ਸਕਦੀ ਇਹ ਸਭ ਕੁਝ ਖਤਮ ਕਰਕੇ ਹੀ ਭਗਤੀ ਸਤ ਸਤੋਕ ਦੇ ਬਾਅਦ ਭਗਤੀ ਸ਼ੁਰੂ ਹੋਣੀ ਇਹਨੂੰ ਤਾਂ ਪਕਤੀ ਦੇਤੀ ਇਹਨਾਂ ਮਲਵਾ ਉਹਦਾ ਵਾਰ ਕੋ ਖਤਮ ਹੋ ਚੁਕਿਆ ਆਪਣਾ ਪਰਾਇਆ ਖਤਮ ਹੋ ਚੁਕਿਆ ਜਾਂ ਸਾਹਿਬ ਜਾਂ ਸਾਹਿਬ ਦੀ ਚਿੰਤਾ ਉਹਨੂੰ ਹੈ ਨਹੀਂ ਉਹਦੇ ਗਾਹਾਂ ਫੇਰ ਪਕਤੀ ਲੱਗੂਗਾ ਕਿਾ ਕਿ ਫੇਰ ਪਕਤੀ ਜੈਨਟਸ ਪਾਸ ਕਰਦੇ ਬਿਲਕੁਲ ਸੀ ਮਿਲਣੀ ਹੈ ਅੱਗੇ ਨੂੰ ਪਕਤੀ ਕਹਾਣੀ ਜਿਹੜਾ ਕਹੇ ਹਰ ਹਰ ਨਾਮ ਰਹਾ ਰੋ ਨ ਆਰਾਧਨਾ ਆਰਾਧਨ ਦੀ ਕਹ ਹਰ ਹਰ ਨਾਮ ਰਹਾ ਰੋ ਨ ਅਸਲੀ ਕੋਈ ਆਰਾਧਨਾ ਨਹੀਂ ਹੁੰਦੀ ਜਦ ਭਗਤੀ ਨਹੀਂ ਹੈ ਜਦ ਨੋ ਭਗਤੀ ਨਹੀਂ ਹੈ ਗੁਰਤੀ ਮਤੂ ਲੈ ਆਣੇ ਇਹ ਗੁਰਤੀ ਮਤ ਲੈਣੀ ਹੈ ਇਹ ਗੁਰਤੀ ਮਤ ਲੈ ਜਿਓ ਤਦ ਹੀ ਭਗਤੀ ਹੈ ਫਸੇ ਦਾ ਹਿੱਸਾ ਗੁਰਤੀ ਮਤ ਲੈਣ ਤੱਕ ਦਾ ਰਹਿਣੀ ਗਵਾ ਮਤ ਮਾਇਦੇ ਬਚਣ ਵਾਸਤੇ ਮਾਇਦੇ ਵਿੱਚ ਰਹਿਣਾ ਨਾਗਰੀ ਦੇ ਵਿੱਚ ਰਹਿਣਾ ਤੇ ਦੰਪ ਤੋਂ ਬਚ ਕੇ ਰਹਿ। ਆਹ ਬਿਧੀ ਹੈ। ਆ ਇਹਦੇ ਵਾਸਤੇ ਗੁਰੂ ਜੀ ਨੇ ਕਿਹਾ। ਭਗਤ ਬਿਨਾ ਉਹ ਡੁੱਬੇ ਜਾਂਦਾ। ਨਹੀਂ ਤਾਂ ਨਗਰੀ ਦੇ ਬਾਦਲਾ ਨਾ ਕੋਲੇ ਕੋਲੇ ਸ਼ਾਣੇ ਪਛੜੀ ਜਿੜੇ। ਤੇਰੇ ਵਾਂਗ ਇੱਥੇ ਰਹਿ ਜਾਣਾ। ਉਹ ਗੱਲਾਂ ਨੇ। ਉਹ ਭਗਤੀ ਨਹੀਂ ਹੈ। ਪਤਰੀ ਉਹਦੇ ਬਾਕੀ ਭਗਤੀ ਦਾ ਧਿਆਨ ਜੁੜਦਾ ਜਿਸ ਤੇ ਆਂ ਜੁੜ ਗਿਆ ਤਾਂ ਭਗਤੀ ਹੋ ਗਈ ਤੇ ਆਂ ਜੋੜਨ ਬਾਸਤੇ ਜਪਾ ਸਾਥ ਸਾ ਸਿਮਰੋ ਗੋਵਿੰਦ ਹੈ ਸਿਮਰਨ ਨਾਲ ਸੱਚ ਭਗਤੀ ਆ ਔਰ ਹਰ ਸਾਹ ਨਾਲ ਚੱਲਦਾ ਰਹਿੰਦਾ ਹੈ ਸਾਥ ਸਿਮਰੋ ਗੋਵਿੰਦ ਤਾਂ ਆਨੰਤਰਿਕ ਇੰਤ੍ਰੇ ਭਗਤੀ ਸ਼ੁਰੂ ਹੁੰਦੀ ਹੈ ਤਰੀ ਕਿਰਪਾ ਜੇ ਸਪੜੀ ਬਸਤੀ ਦੇ ਸਭ ਕੋਈ ਛੋਟ ਕੇ ਸਭ ਕੇ ਬਾਅਦ ਦੇ ਵਿੱਚ ਪੁਤੀ ਦੀ ਗੱਲ ਹੈ ਉਹ ਵੀ ਇਹ ਸ਼ਰਤਾਂ ਪੂਰੀਆਂ ਕਰੇ ਤਾਂ ਜਿਹੜਾ ਮਾਇਆ ਦਾ ਪ੍ਰਭਾਵ ਹੈ ਉਹ ਤੋਂ ਮੁਕਤ ਹੋ ਕਰ ਲਵੇ ਆਪਣੇ ਆਪ ਨੂੰ ਮਾਇਆ ਦੇ ਹੋ ਤੋਂ ਮੁਕਤ ਕਰ ਲਵੇ ਆਪਣੇ ਆਪ ਨੂੰ ਲੋਭ ਤੋਂ ਫਰੂਟ ਸੀਵੇ ਆਪਣੇ ਆਪ ਫੇਰ ਕਦੇ ਜASE ਪੁਤੀ ਦੀ ਗੱਲ ਸ਼ੁਰੂ ਹੋਏ ਕਿਸੇ ਫਾਇਦੇ ਸਾਫ ਬੀਕੋ ਕੀ ਦੇ ਜਾਣ ਤੇ ਜਦ ਨਾਨਕ ਤੇ ਜਨ ਨਾਮ ਮਿਲੇ ਤੇ ਜਨ ਨਾਮ ਮਿਲੇ ਉਹ ਸਾਰੇ ਹਲ ਨਾਮ ਦੇ ਵਿੱਚ ਖਵਾ ਕਰਦੇ ਹੁਕਮ ਨੇ ਰਸਮਾਂ ਦੇ ਉਹ ਜਦ ਤਾਂ ਖਦੇ ਜਾ ਕੇ ਹੁਕਮ ਨੇ ਰਸਮਾਂ